ਪਿਲਾਵਲ ਮਹੱਲਾ ਜ ਵਾਰ ਸਤ ਕਰ ਦਸਵਾ ਇਕ ਓੰਕਾਰ ਸਤਗੁਰ ਪ੍ਰਸਾਦ ਆਦਿਤ ਵਾਰ ਆਦ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਆਦਿਤ ਵਾਰ ਇਤਵਾਰ ਨੂੰ ਕਹਿੰਦੇ ਨੇ ਛਾਈ ਨੇ ਉਹਨਾਂ ਦੇ ਮੁਤਾਬਕ ਇਹ ਤਾਂ ਕਿ ਇਹਨਾਂ ਦਾ ਕਿਨਾਰਾ ਰਿਤੀ ਹੈ 7 ਦਿਨ ਦੀ ਛੁੱਟੀ ਕੀਤੀ ਹੈ ਸਰਦਾਰ ਅੱਕੇ ਆਸਤਵਾਰ ਦੀ ਗੱਲ ਕੀਤੀ ਹੈ ਆਦਤਵਾਰੀ ਅਰਨ ਤੇ ਅਰੀ ਵੀ ਹੈਗੀ ਹੈ ਜਦੋਂ ਛੁੱਟੀ ਹੈ ਨਾ ਕੋਈ ਰਚਨਾ ਹੈ ਨਹੀਂ ਉਹ ਛੁੱਟੀ ਤੇ ਹੁੰਦੀ ਵੇ ਕੋਈ ਕੰਮ ਨਾ ਨਹੀਂ ਕਰੀਦਾ ਹੁੰਦਾ ਛੁੱਟੀ ਵਾਲੇ ਦਿਨ ਰਚਨਾ ਹੈ ਨਹੀਂ ਤਾਂ ਉਹਨੂੰ ਕੋਈ ਕੰਮ ਨਹੀਂ ਆਦਤਵਾਰੀ ਆਦਪੁਰ ਕਥਾ ਹੈਗਾ ਆਪ ਪਰ ਹੈਗਾ ਵੇਲਾ ਸੋਨੇ ਉਸ ਵੇੜੇ ਆਪ ਦਾ ਹੈਗਾ ਹੋਰ ਕੋਈ ਨਹੀਂ ਮਾਇਆ ਨਹੀਂ ਹੈ ਰਚਨਾ ਨਹੀਂ ਹੈ ਇੱਕੋ ਹੀ ਹੈ ਜੋਤ ਹੈ ਪੂਰਨ ਜੋਤ ਹੈ ਸੋਨੇ ਸਮਾਦ ਵਿੱਚ ਕੋਈ ਅਥੋਰਾ ਵਸਤਾ ਵਿੱਚ ਪੂਰਨ ਜੋਤ ਹੈ ਹਾਂਜੀ ਠੀਕ ਹੈ ਜੀ ਉਤਪੋਤ जग ਰਹਾ ਪਰੋਈ ਆਪੇ ਕਰਤਾ ਕਰੈ ਸੋ ਹੋਈ ਹੁਣ ਇਸ ਵਕਤ ਜਗ ਵਿੱਚ ਆ ਉਹ ਕੋਤ ਜਗ ਰਹਾ ਪਰੋਈ ਹੁਣ ਜਗ ਦੇ ਵਿੱਚ ਬਹੁਤ ਬਹੁਤ है ਆ ਉਹ ਇਸ ਵਕਤ ਜਗ ਨੂੰ ਆਪਣੇ ਕਾਬੂ ਚ ਰੱਖਿਆ ਹੋਇਆ ਪਰੋਇਆ ਹੋਇਆ ਜਗ ਨੂੰ ਅਕਾਸ਼ ਰੂਪੀ ਸੂਤ ਨੇ ਆ ਫੜਿਆ ਹੈ ਅਕਾਸ਼ ਸਾਰਿਆਂ ਦੇ ਅੰਦਰ ਹੈ ਜਿਵੇਂ ਬਣ ਕੇ ਹੰਡ ਵਿੱਚ ਧੋਰ ਹੁੰਦੀ ਹੈ ਕਾਹਦੀ ਧੋਰ ਦੇ ਵਿੱਚ ਸਭ ਕਾਬੂ ਕਰਕੇ ਰੱਖੇ ਨੇ ਅਕਾਸ਼ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਉਹ ਤੋਂ ਅਕਾਸ਼ ਜੇ ਨਾਲੋਂ ਆਪਸ ਅਕਾਸ਼ ਉਹਦਾ ਉਹਦੀ ਦੇਹ ਹੈ ਆਪਣੀ ਦੇਹ ਉਹਦੀ ਅਕਾਸ਼ ਹੈ ਅਕਾਸ਼ ਦੇ ਵਿੱਚ ਪਰੋਏ ਹੋਏ ਨੇ ਆਪਣੀ ਦੇਹ ਪਰੋਏ ਆਏ ਕੋਈ ਗੱਲ ਮਾਪੇ ਕਰਤਾ ਕਰੇ ਤੋਂ ਉਹੀ ਇਸ ਕਰਕੇ ਜੋ ਕਰਤਾ ਆਪ ਕਰਦਾ ਉਹੀ ਹੁੰਦਾ ਉਹ ਜਿਵੇਂ ਹਲਾਉਂਦਾ ਡੋਰੀ ਨੂੰ ਉਵੇਂ ਸਾਰੇ ਕਰਦੇ ਨੇ ਜਿਵੇਂ ਉਹਦੀ ਇੱਛਾ ਹੈ ਉਹਦੇ ਅਨਸਾਰੇ ਕੰਮ ਕਰਦੇ ਸਾਰੇ ਹਾਂਜੀ ਜਗ ਤੋਂ ਕੀ ਭਾਵੇਂ ਜੀ ਮਾਇਆ ਦਾ ਸਰੀਰ ਜਗ ਹੁੰਦਾ ਜਗ ਸੱਚੇ ਕੀ ਹੈ ਕੋਠੜੀ ਕਿਹੜਾ ਮਾਇਆ ਦੇ ਵਿੱਚ ਜੀਵ ਹੈ ਉਹ ਜਗ ਦੇ ਵਿੱਚ ਹੀ ਹੈ ਜਗ ਰਚਨਾ ਸਭ ਝੂਠ ਹੈ ਤੇ ਇਹਦਾ ਜਗ ਹੈ ਸਭ ਜਿੱਤੇ ਚੇਤਨਾ ਦੇ ਵਿੱਚ ਹੋ ਜਾਂਦਾ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੁੱਝੈ ਕੋਈ ਨਾਮ ਦਾ ਕੋਈ ਰੰਗ ਚ ਰੰਗਿਆ ਜਾਵੇ ਸਦਾ ਵਾਸਤੇ ਸੁਖ ਹੋ ਜਾਂਦਾ ਉਹਨੂੰ ਟੈਂਪਰੇਰੀ ਹੋਰ ਚੀਜ਼ਾਂ ਜਿ ਵੀ ਹੈਗੀਆਂ ਨੇ ਪਰ ਨਾਮ ਦਾ ਰੰਗ ਸਦਾ ਸੁਖ ਦੇਣ ਵਾਲਾ ਹੈ ਲੇਕਿਨ ਸਾਨੂੰ ਸਦਾ ਸੁਖ ਚਾਹੀਦਾ ਨਾਮ ਦੇ ਰੰਗ ਚ ਆਪਣੇ ਮਨ ਨੂੰ ਰੰਗਣਾ ਪਊਗਾ ਸਦਾ ਸੁਖ ਹੋਈ ਇਹ ਗੱਲ ਨੂੰ ਕੋਈ ਬਿਰਲਾ বুঝਦਾ ਗੁਰਮੁਖ ਜਿਹੜਾ বুঝ ਲੈਂਦਾ ਉਹ ਨਾਮ ਦਾ ਰੰਗ ਚਾਹ ਲੈਂਦਾ ਸਦਾ ਸੁਖ ਦੀ ਇੱਛਾ ਸਭ ਨੂੰ ਹੀ ਹੈ ਪਰ ਇਸ ਗੱਲ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਹੈ ਵੀ ਨਾਮ ਦੇ ਰੰਗ ਨਾਲ ਸਭ ਹੋ ਜਾਂਦਾ ਉਹ ਹੋਊ ਤਾਂ ਬਾਅਦ ਰੰਗ ਛੱਡੂਗਾ ਰੰਗ ਨਹੀਂ ਕੋਈ ਛਡਾਉਂਦਾ ਵਿਸ਼ਵਾਸ ਹੈ ਨਹੀਂ ਜਿਹੜਾ বুঝ ਲੈਂਦਾ ਗੁਰਮੁਖ ਉਹ ਚਾਹ ਲੈਂਦਾ ਜਾਨੀ ਠੀਕ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ ਹੁਣ ਆਪਾਂ ਦੀ ਪੰਕਤੀ ਕਰਦੇ ਹਾਂ ਜੀ ਫਿਰਦੇ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸਵਾਮੀ ਜਨ ਫਗ ਲਗ ਧਾਵੋ ਹੋਏ ਦਾਸਨ ਦਾਸਾ ਰਹਾਉ ਫਿਰਦੇ ਜਪਨੀ ਜਪੋ ਗੁਣ ਤਾਸਾ ਫਿਰਦੇ ਬੁੱਧੀ ਨੂੰ ਤਰਾ ਕੇ ਜਪਣੀ ਬੁੱਧੀ ਨੂੰ ਕਹਿੰਦੇ ਨੇ। ਇਹ ਤਾਂ ਸਮਝਣਾ ਆਇਓ ਜਪਣੀ ਹੈ। ਸਮਝਣਾ ਤਾਂ ਅਕਲ ਨਹੀਂ ਹੈ। ਅਕਲ ਨਹੀਂ ਸਾਹਿਬ ਸਹੀ ਹੈ। ਗੱਲ ਹੀ ਅਕਲੀ ਪੜ ਕੇ ਅਕਲੀ ਕੀ ਜੇਦਾਨ। ਆ ਦਾ ਕੰਮ ਨੇ ਸਮਝਣਾ। ਇਹ ਅਕਲ ਹਿਰਦੇ ਚ ਟਿਕੀ ਰਹੇ ਇਹ ਵਿਚਾਰੇ ਗੁਰਬਾਣੀ ਨੂੰ। ਤਾਂ ਸਮਝ ਲੋ ਨੇ ਜਿਹੜੇ ਗੁਣ ਨੇ ਗੁਰਬਾਣੀ ਦੇ। ਜਪੋ ਗੁਣ ਤਾਂ ਉਹਦੇ ਗੁਣਾਂ ਨੂੰ ਸਮਝੋ। ਅਕਲ ਨੂੰ ਟਕਾ ਕੇ ਆਪਣੇ ਅੰਦਰ ਰੱਖੋ ਉਹਦੇ ਗੁਣਾਂ ਨੂੰ ਸਮਝੋ ਹਰ ਆਗਮਾ ਹੈ ਆਦਮੀ ਬੁੱਧੀ ਤੇ ਪਰੇ ਆ ਹਰ ਆਦਮੀ ਦੀ ਬੁੱਧੀ ਤੋਂ ਉੱਤੇ ਅੱਖਾਂ ਨੇ ਨੱਕਾ ਪਦ ਅਪਰਸ਼ ਚਮੜੀ ਦਾ ਜੀਭ ਪਕੜ ਕੇ ਸਾਡੇ ਖੱਟਾ ਮਿੱਠਾ ਉੱਥੇ ਤੱਕ ਆ ਦਿਮਾਗ ਦੇ ਪਕੜ ਕੇ ਜਿਹੜੀ ਗੱਲ ਉੱਥੇ ਤੱਕ ਤਾਂ ਬੁਨੁਖੀ ਬੁਦੀ ਕੰਮ ਕਰਦੀ ਹੈ ਉਹ ਤੋਂ ਗਾਹਾਂ ਨਹੀਂ ਕੰਮ ਕਰਦੀ ਇਹ ਉਹ ਗਾਹਾਂ ਦੀ ਗੱਲ ਜਿਹੜਾ ਆਤਮਨ ਦਾ ਗਿਆਨ ਇਹ ਉਹ ਗਾਹਾਂ ਆਤਮਨ ਆ ਵੀ ਹੈ ਨਾ ਉਹ ਤੋਂ ਅਸੀਂ ਮਹਿਸੂਸ ਕਰ ਸਕਦੇ ਹਾਂ ਇਹ ਕਰਕੇ ਗਿਆਨ ਇੰਦਰਿਆ ਤੋਂ ਭਰੇ ਹੈ ਤਾਂ ਬੁਨੁਖੀ ਤੋਂ ਵੀ ਭਰੇ ਰਾਮੋ ਕੋਚ ਰੈ ਇਹਨੂੰ ਵਿਚਾਰਿਆ ਜਾ ਸਕਦਾ ਗੁਰਬਾਣੀ ਦੀ ਬਦਲ ਗੁਰਬਾਣੀ ਵਿੱਚ ਗੁਰਬਾਣੀ ਕੀ ਕਥਾ ਹੈ ਆਰਤੀ ਕੀ ਕਥਾ ਹੈ ਇਹ ਹਾਲ ਨੂੰ ਜਾਣਨ ਗੁਰਬਾਣੀ ਨੂੰ ਵਿਚਾਰਨਾ ਹੀ ਪਊਗਾ ਨੂੰ ਵਿਚਾਰ ਕੇ ਹੀ ਉਹਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹਰ ਦਾ ਰਾਮੋ ਕੋਚ ਰੈ ਹਰ ਇਹ ਗੱਲ ਜਿਹੜੇ ਜਾਣੇ ਹਰ ਕੇ ਉਹਨਾਂ ਦੇ ਵਾਲੇ ਪੱਗ ਨੇ ਉਹਨਾਂ ਨੂੰ ਲੱਗਣਾ ਪੱਗ ਦਾ ਮਤਲਬ ਉਹਨਾਂ ਦੇ ਪਿੱਛੇ ਲੱਗਣਾ ਜਿਵੇਂ ਉਹਨਾਂ ਨੇ ਜਾਣਿਆ ਓਵੇਂ ਤੁਸੀਂ ਜਾਣਨਾ ਜਿਵੇਂ ਉਹਨਾਂ ਨੇ ਜਾਣੇ ਹੁੰਦੇ ਫਿਰ ਦਿੱਤਾ ਗੁਰਬਾਣੀ ਚਰਨ ਲਾ ਕੇ ਪਿੱਛੇ ਲਾ ਜਿਹੜੇ ਗੁਰਬਾਣੀ ਨੂੰ ਲਿਖਣ ਵਾਲੇ ਨੇ ਸਾਰੇ ਦਾਸ ਨੇ ਭਗਤ ਉਹਨਾਂ ਦੇ ਵੀ ਦਾਸ ਬਣ ਕੇ ਸਮਝਿਆ ਜਾਵੇ ਹੋਰ ਕੋਈ ਤਰੀਕਾ ਨਹੀਂ ਜੇ ਅਸੀਂ ਭਗਤਾਂ ਨੂੰ ਆਪਣੇ ਨਾਲੋਂ ਇਹ ਮੰਗਾਉਗੇ ਉਹ ਦੀ ਗੁੱਤੀ ਆਪਣੇ ਗੁੱਤੀ ਨੂੰ ਇਹ ਫਿਰ ਇਹ ਮੰਗਾਉਗੇ ਤਾਂ ਹਾਲ ਨੂੰ ਮੰਗਾਵੇ ਤਾਂ ਹੀ ਅਸੀਂ ਸਮਝ ਸਕਾਂਗੇ ਗੱਲ ਵਾਜੀ ਠੀਕ ਹੈ ਜੀ